ਜੇ ਅਛਲ ਅਸ਼ੇਦ ਅਪੇਸ਼ ਸਮਾਇਆ ਤੂੰਾ ਕਿਸੇ ਵਿਆਪਤ ਮਾਇਆ ਜੇ ਅਛਲ ਜਿੱਤੇ ਛੜ ਰਹਤ ਹੋਵੇ ਛਲ ਤੇ ਆਗਰ ਦਤਾ ਅਛਲ ਹੋ ਗਿਆ ਅਸ਼ੇਦ ਅਛੇਦ ਅਛੇ ਦਾ ਛੇਦ ਨਹੀਂ ਉੱਥੇ ਛੇਦ ਹੋਣਾ ਨਹੀਂ ਛਾਲ ਦੇ ਨਾਲ ਛਿੱਤਰ ਲੱਗਿਆ ਹੋਇਆ ਜਿੰਨੇ ਛਾਲ ਕੱਟਨੇ ਹੁੰਦੇ ਈ ਛਿੱਤਰ ਨੇ ਸਾਡੇ ਜਿੱਥੇ ਕੰਮ ਨਹੀਂ ਜਿੱਤੇ ਝੂਠ ਬੋਲੇ ਨੇ ਤੋਂ ਮੱਤਨਾ ਓਹੀ ਹੈ ਜਿੰਨੇ ਝੂਠ ਬੋਲੇ ਨੇ ਠਿਕਤਰਮ ਨੇ ਵਿੱਚ ਝੂਠ ਰਵਾ ਲਿਆ ਬਾਅਦ ਚ ਆ ਕੇ ਸਾਡੀ ਨਾਲੇ ਹੋਰ ਹੋੜੇ ਪਰੇ ਦੇ ਓਦੋਂ ਛਿੱਤਰ ਹੋ ਗਏ ਉਹਨੇ ਸਵਾਲ ਨੇ ਕਿ ਆਪ ਇਸ ਕੋਲ ਜਵਾਬ ਕਦੇ ਨਹੀਂ ਦਿੰਦੇ ਝੂਠ ਐਕਸੈਪਟ ਕਰ ਲਿਆ ਵੇਰਾ ਜਰਜਰਾ ਕਰ ਲਿਆ ਕਰਦਨ ਤਾਂ ਆਪਣੇ ਆਪਣੇ ਪਰ ਘੇ ਬਣਾਤਾ ਜੈ ਉਹਨਾਂ ਦਾ ਦੋ ਸੋਟਾ ਬਣਾਤਾ ਉਹ ਬਡੇ ਭਾਈ ਜੋ ਸੀਗੇ ਉਹ પતિ ਪਤੀ ਸੀ ਬਡੇ ਭਾਈ ਸੀ ਉਹਨਾਂ ਆਵੇ ਜਾਨੇ ਢੀਕ ਹੁੰਦਾ ਫੁੱਲੇ ਕਫੇ ਮਾਇਆ ਦੇ ਮਰਦੇ ਹੁੰਦੇ ਨੇ ਜਦੋਂ ਫੁੱਲੇ ਕਫੇ ਲੈਣੇ ਨੇ ਉਹ ਗੁਰੂ ਦੇ ਭੁੱਖੇ ਮਾਰਦੇ ਤੇ ਗੱਡਿਆਂ ਦੇ ਸਵਾਰ ਦਤੀ ਫਿਰਦੇ ਤੇ ਉਹ ਤੁਸੀਂ ਛੱਡੋ ਪਰੇ ਉਹਨੇ ਤਾਂ ਸੋਣਾ ਬਸਦਾ ਰੋਜ਼ ਉਹ ਐਸੇ ਸੁੱਤੇ ਪਏ ਹੁੰਦੇ ਨੇ ਜਿਨ੍ਹਾਂ ਨੇ ਗੋਲਗਾ ਖੋਲਨੇ ਸੋਣਾ ਉੱਤੇ ਪੱਥਨ ਲੱਗ ਜਾਂਦਾ ਫਿਰ ਗੋਲਗਾ ਦਾ ਜੋੜਦੇ ਨਹੀਂ ਹੁੰਦੇ ਬਸ ਜਿਨ੍ਹਾਂ ਨੇ ਸਾਹਮਣਾ ਉਹ ਤਾਂ ਸੁੱਤੇ ਜੇ ਨਾਲ ਸਾਹਮਣਾ ਗੋਲਗਾ ਜਿਨ੍ਹਾਂ ਦੀ ਜੇਬ ਚੋਂ ਲੱਗ ਜਾਂਦਾ ਰਾਇ ਵਧੀਆ ਕੋ ਵਧੀਆ ਵਰਧਾੜੀਆਂ ਵਾਸਤੇ ਹੀ ਰਵੱਲ ਗਿਆ ਉਹਦਾ ਮੂਰਖਾ ਦਾਤਾ ਗੱਲ ਬਾਰੇ ਆ ਮੈਨੂੰ ਗੋਦਾ ਫਾੜੀ ਦੇ ਕੋਪਾ ਨਹੀਂ ਵੀਰੀ ਧੀ ਕੇ ਆ ਗਏ ਉਹ ਨਾ ਉਹ ਨਾ ਉਹ ਇਲਾਕਾ ਵੀ ਤਾਂ ਜਹਾਂ ਕਿਸੇ ਵਿਆਪਤ ਮਾਇਆ ਉਹ ਭਾਈ ਮਾਇਆ ਉੱਤੇ ਕਿਹਨੂੰ ਵਿਆਪਣੀ ਆ ਆਇਆ ਜਦ ਵਿਆਪਦੀ ਆ ਥੱਲੇ ਦੇ ਪਾਣੀ ਜਾਤ ਪੈਂਦਾ ਜਾਂ ਛੇਦੋ ਕੇ ਕਿਸ਼ਤੀ ਚ ਇਹ ਥੋੜੀ ਕੀਤੇ ਛੇ ਦਾ ਤਾਂ ਪਾਣੀ ਪਉ ਥਲਿਆ ਇਹ ਛੇਰੇ ਕੋਈ ਨੀ ਨਾ ਛੇਦਾ ਨਾ ਛੜਾ ਜਾਂ ਤਾਂ ਛੜ ਦਵੂ ਕਿਸੇ ਛੇ ਦਬੋ ਤਾਂ ਆਇਆ ਵਿੱਚ ਵੜੂਗੀ ਅਗੇ ਜਾਂ ਤਾਂ ਕਹਿੰਦੇ ਬੇਇਮਾਨੀ ਹੋਊਗੀ ਛੜਾਊਗੀ ਤੇ ਨਹੀਂ ਕਰਦੋ ਇੱਕ ਪਥ ਬਹੁਤ ਜ਼ਿਆਦਾ ਕਲ ਉਟੇਣੀ ਹੋਣੀ ਪੜੀ ਬਈ ਯਾ ਫਿਰ ਛੇਦ ਕਰੂ ਇਹਨਾਂ ਨੇ ਆਪਣੇ ਖੇਤ ਕਰ ਲਏ ਪਾਣੀ ਵਧੂਗਾ ਜਦੋਂ ਵਰਖੀ ਹਰੇਕ ਸਾਲ ਡੋਲਦਨ ਹੈ ਹੋਰ ਜਮਾ ਜਾਂਦਾ ਹਾਂ ਪਾਣੀ ਜਿਹੜਾ ਬੰਦਾ ਅਸ گول ਕਦੀ ਪਾਣੀ ਨੇ ਉਹ ਤੋਂ ਨਹੀਂ ਆਉਂਦਾ ਉਹਦਾ ਆਇਗਾ ਆਪਣਾ ਉਹਦਾ ਫਤਗਲ ਕੋਈ ਉਹਦਾ ਉਹਦੇ ਜਵਾਕ ਨੰਬਸੀ ਮੇਰਾ ਮੋਤੀ ਮੇਰਾ ਉਹਨਾਂ ਖੇਸੀ ਦੇ ਵਿੱਚ ਪੜਿਆ ਹੋ ਸਾਰੇ ਡੋਟ ਵਿੱਚ ਪਾਣ ਸੀ ਪੰਡ ਬੰਦ ਕਰ ਬੰਨਣਾ ਅੰਦਰ ਉਹਨਾਂ ਦਾ ਭਾਈ ਇਹੀ ਠੀਕ ਹੈ ਹੀਰਾ ਠੀਕ ਜਾਨਾ ਵਾਸਤੇ ਸਾਡੇ ਵੀ ਖੁਸ਼ ਹੈ ਤੁਮਰੇ ਪੜਾਓ ਤੋ ਉਹ ਪੜਾ ਦੋ ਬਦਲ ਲਾ ਦੋ ਬੰਦ ਉਹ ਜਿਹੜੇ ਆਲੇ ਉਹ ਜਿਹੜੇ ਕੁਝੇ ਇਹਨਾਂ ਦਾ ਆਪਣਾ ਵਧੀਆ ਤਾਲਮੇਲ ਚੱਲੇ ਹੋਇਆ ਬੰਦ ਕੀ ਲੱਗ ਗਿਆ ਇਸ ਗੱਲ ਤੇ ਪਰ ਜੇ ਸਿੱਖੀ ਪੜ੍ਹਦੇ ਲੋਗ ਗਲਤੀ ਗੁਰੂ ਵਾਲੀ ਗੱਲ ਨਹੀਂ ਹਾਂ ਇਹ ਤਾਂ ਦੁਨੀਆ ਵਾਸਤੇ ਦੱਸ ਰਹੇ ਹਾਂ ਸਾਡੀ ਜਿਹੜੀ ਹੈ ਗੁਰਮਤਾ ਕਹਿੰਦੀ ਇਹ ਬੰਦ ਅਸਲੀ ਗੁਰਮਤਾ ਹੈ ਇਹ ਜਮਤਾਂ ਕਰਦੇ ਆ ਤੁਸੀਂ ਵੀ ਜਾਣਦੇ ਹੋ जे नहीं जानते सब लोग के कबदल ए माया के दिवानें पुरानी झूठ डसोरी पाई ए माया दे दिवानें हो गए झूठ ना ठगी मार ली ना ठगे ताप होए ते कहनें ठग दीयो लायक आन आया, आया जग लायक आन गया ठगाए ठग ठक। ओ ठगी खा गए ए गया आप जन गुवा के ए कठे करे माया ਗੋਲ ਕਾਂਤੀ ਇੱਥੇ ਜੋ ਮਰਜ਼ੀ ਬਣਾ ਲਓ ਤਾਂ ਇੱਥੇ ਹੀ ਰਹਿ ਜਾਣਗੇ ਐਥੇ ਹੀ ਛੱਲ ਜਾਣੀਆਂ ਲੈ ਕੇ ਕੋਈ ਵੀ ਜਾ ਸਕਦਾ ਚਾਹੇ ਕਿੱਟੇ ਮਹਿਲ ਬਣਾ ਲਓ ਜੋ ਮਰਜ਼ੀ ਬਣਾ ਲਓ ਇੱਥੇ ਰਹਿ ਜਾਣਗੇ ਨਾਲ ਕੀ ਜਾਊਗਾ ਨਾਲ ਜਾਣਗੇ ਬੇੜੀ ਨਾਲ ਜਾਣਗੇ ਉਹ ਬਸ ਨਾਲ ਜਾਊਗੀ ਜਿੰਤਾ ਕਿਆ ਕਹੀ ਉਹ ਦਾਰਾ ਨੇ ਕਿਆ ਕਰਦੀ ਪਿਓ ਸਰਦਰ ਕੰਪੂਗਾ ਮੇਰੇ ਬਾਲਾ ਜੀਓ ਸਰਦਰ ਕੰਪੇ ਬਾਲਾ ਜੀਓ ਕਿਆ ਜਾਨਾ ਕਿਆ ਕਰਦੀ ਪਿਓ ਡਰ ਆ ਗਿਆ ਨਾ ਸਭੇ ਘੁੱਟ ਲਈ ਫਿਰ ਸਰਦਰ ਕੰਪੂਣੇ ਹੁਣ ਪਤਾ ਦੀ ਉਹ ਕਿਹ ਕਿਉਂ ਤੇ ਉਸ ਵੇਲੇ ਦੀ ਗੱਲ ਆ ਜਿਹਨਾਂ ਦਾ ਉਹ ਵੇਲਾ ਯਾਦ ਰੱਖਣਾ ਜਦੋਂ ਸੰਗੀ ਤੱਪਣੀਆਂ ਨਾ ਆ ਕੇ ਜਿਹਨਾਂ ਦਾ ਉਹ ਵੇਲਾ ਪਾਈ ਯਾਦ ਰੱਖਣ ਉਹ ਤਾਂ ਨਹੀਂ ਇਦੋਂ ਚੱਲਦਾ ਜੋ ਜਮਾਇ ਕੇ ਰੁਕ ਪਟ ਗਏ ਹਾਂ ਜੇ ਕੈਸਾ ਦੇ ਫੜਕੇ ਉਹਨੂੰ ਪਾੜਨਾ ਥੱਲੇ ਪੜਕਾ ਕੇ ਜਿਹੜਾ ਤਾਂ ਉਹ ਚੀਜ਼ ਹੈ ਜੇ ਕੋ ਕੋ ਕਮੀ ਉਹ ਨਹੀਂ ਯਾਦ ਕਰੀ ਇਹਨੇ ਛਤਰਪਰੇਡ ਨੇ ਕੁਰਸੀ ਵੀ ਯਾਦ ਰੱਖਣੀ ਮਰਜ਼ੀ ਕਰੇ ਬਲੈਕ ਕਰੇ ਜੋ ਮਰਜ਼ੀ ਕਰੇ ਢੱਕਾ ਮਾਰੇ ਜਿਹੜਾ ਛਤਰਪਰੇਡ ਦੇਖ ਕੇ ਹੀ ਲੱਗਦਾ ਵੀ ਭਾਈ ਬੇਇੱਜ਼ਤੀ ਨਹੀਂ ਕਰਉਣੇ ਇੱਦੀ ਖਾਲਾਂਗੇ ਰੁੱਖੀ ਖਾਲਾਂਗੇ ਥਾਰੇ ਦੁਨੀਆ ਦੀ ਬਦਨਾਮੀ ਨਾਲੇ ਉੱਤੇ ਛਤਰਪਰੇਡ ਉਹ ਨਹੀਂ ਕਰਦਾ ਵੇਖ ਕਰਦੇ ਹੀ ਨੇ ਲੋਕ 2 ਨੰਬਰ ਦਾ ਕੁੱਪੀ ਕਰਦੇ ਤਰੀਕਾ ਇਹ 2 ਨੰਬਰ ਦਾ ਕਮ ਹੈ ਇਹ ਜਿਹੜਾ ਕੋ ਕਰ ਰਿਹਾ ਇਹ ਗੋਰ ਕਾਲੇ ਇਸਮ 2 ਨੰਬਰ ਦਾ ਕਮ ਹੈ ਹਾਂ ਜੇ ਮਾਇਆ ਉਹਨਾਂ ਕਿਸੇ ਵਿਆਪਤ ਹੋਇਆ ਉਹ ਮਾਇਆ ਕਿਉਂ ਵਿਆਪਣੀ ਏ ਜੇ ਅਛਾਲਾ ਛੱਤ ਤੇ ਅਜਿਹਾ ਵਿਚਾਲਾ ਕਬਟ ਹੈ ਨਹੀਂ ਕੋਈ ਕਦੇ ਕਬਲੀ ਹੈ ਨਹੀਂ ਕੋਸਰਾਕ ਹੈ ਨਹੀਂ ਸਰਾਖ ਦੀ ਬਾਇਲੀ ਖੋ ਜਾਂਦੀ ਹੈ ਸਰਾ ਕਾਚ ਹੁੰਦੀ ਹੈ ਜਿਹੜੀ ਕੀ ਸਰਾਖ ਹੁੰਦਾ ਕਿਸੇ ਕੀ ਹੈ ਸਾਡੇ ਕੋਲ ਸਾਡੇ ਕੋਲ ਸੱਤ ਸੱਤ ਤੋਪ ਦਾ ਜਾਜ ਇਸ ਤੀ ਕਿਹੜਾ ਸੰਤੋਖ ਹੈ ਨਾ ਇਹਦੇ ਜਦੋਂ ਛੇਦ ਹੋ ਜਾ ਤਾਂ ਆਇਆ ਅੰਦਰ ਬੁਲੂ ਫਟੋ ਉੱਟ ਜਾ ਕੇ ਕਰੈਕ ਹੋ ਜਾ ਜਦੋਂ ਸੰਤੋਖ ਦੋ ਵਿੱਚ ਸਰਾਖ ਹੋ ਗਿਆ ਸੰਤੋਖ ਜੋ ਕਾ ਤੁਸੀਂ ਮੋਰੀ ਕਾਲੀ ਬੜੀ ਮੋਟੀ ਏਟਰ ਦੇ ਮਾਲਾ ਮੋਟਾ ਪਾਣੀ ਬਾਹਰ ਹੋਊਗਾ ਜਾਈਦਾ ਉਹ ਛੋੜੇ ਸਲਾਕਾ ਲਓ ਉਹਨਾਂ ਰਾਜਾ ਜੇ ਅਸ਼ੇਦ ਸਮਾਇਆ ਜਨਾ ਜੇ ਅਸ਼ੇਦ ਹੋ ਕੇ ਉਹਨਾਂ ਜਰ ਮਾਇਆ ਨਹੀਂ ਲਗਿਆ ਜੇ ਅਪੇਦ ਸਮਾਇਆ ਅਪੇਦ ਵੀ ਭੇਡਿਆਂ ਨਹੀਂ ਜਾ ਸਕਦਾ ਜੇ ਕੋਈ ਤੁਹਾਨੂੰ ਦੇਣਾ ਹੀ ਤੁਹਾਨੂੰ ਲਾਲਚ ਦੇ ਲੋਗ ਬਸ ਪੌਣਾ ਵੀ ਜਾਂਦਾ ਹੋਵੇ ਤੁਸੀਂ ਨਹੀਂ ਮੰਨਦੇ ਉਹ ਭੇਜ ਭੇਟਣਾ ਚਾਹੇ ਕੋਈ लालच बस करना चाहे कोई येन रातों वो कर दिए ए अपे दनीर है आके लागे गुरुद्वारे बना ले काली फूल हसन कहता कब ना करो माया रे भईमतू कहने चलो ठीक है कर लो तुसी कर लो हां जी आप उसको अपने इस गुण का नाही प्रवेश आप उसको अपने आदेश अपने आपनो आपे आदेश कर ਆਦੇਸ हैं कौन कर रहे हैं जे माने आदेश कर रहे हैं प्रभु चेतन तो अपने आपनो आपे कर रहे हैं खुद ही कर रहे हैं आदेश से गए आदेश अदअदिल अनाथाना जगजग ये चूक ਆਦੇਸ਼ ਹੁਣ ਤਾਂ ਨਮਸਕਾਰ ਕਰਨਾ ਜਿੱਦੀ ਅੰਸਾ ਕੋਕਮੇ ਤੁਹਰਾਮ ਕੀ ਅੰਸ ਰਾਵਨ ਨੂੰ ਅੰਸ ਕੀਤਾ ਆਪਣੇ ਅੰਦਰਲੇ ਬਾਹਰ ਤਾਂ ਕਿਸੇ ਨੂੰ ਕੀਤਾ ਨਹੀਂ ਆਦੇਸ਼ ਸਹੀ ਬਹਾਰਾ ਦੇਸ਼ ਦਾ ਸਰਦੇਸੀ ਕਿਸੇ ਨੂੰ ਵੀ ਆਦੇਸ਼ ਬਾਬਾ ਆਦੇਸ਼ ਆਜ਼ਾਦੀ ਸਿਰਾਮ ਤਨ ਪਾਇਆ ਜੁਗ ਜੁਗ ਹੋ ਗਏ ਵਿਰਾਸਤ ਦਬਾਇਤ ਇਹ ਇਹ ਇਹ ਸ਼ਬਦ ਗੁਰੂਆਂ ਦੇ ਚੱਬਾਪਾ ਦੇ ਸਕੇ ਤੇ ਆਪਣੇ ਆਪ ਨੂੰ ਆਦੇਸ ਪਹਿਲੀ ਸਟੇਜ ਆ ਪੂਲ ਨੰਬਰ ਬਣਦੀ ਆ ਉਹ ਫਿਰ ਇਹਦਾ ਬੁੱਧਾ ਆਦੇਸ ਇਹਦਾ ਮੰਨਿਆ ਆ ਦੇ ਇਸ ਕੀਤਾ ਨਾ ਉਹ ਜਿੰਨੇ ਆ ਦੇ ਇਸ ਕੀਤਾ ਗਿਆ ਉਹ ਸਤਪੁਰ ਦਾ ਆਦੇਸ ਹੈ ਇਹ ਮੰਜ਼ਿਲ ਲੈਵਲ ਦਾ ਆਦੇਸ ਹੈ ਬੜੂਤੇ ਦਾ ਦੇਸ ਸਤਗੁਰ ਜਦ ਕੰਢੇ ਲੱਗਦੀ ਹੈ ਨਾ ਕਿਸੇ ਜਾ ਕੇ ਸਤਗੁਰ ਤਾਂ ਸਵਾਦ ਦਾ ਦਰਾਂ ਪੂਰੇ ਜਾਂਦਾ ਉਹ ਜਦ ਕੋ ਉਹ ਫੇਰਾ ਆਦੇਸ ਬਾਬਾ ਆਦੇਸ ਆਦਾ ਨੀਰ ਤੇ ਰਾਂਤ ਨਾ ਪਾਇਆ ਰਾਂਤ ਤੋਂ ਦਬਾਇੀ ਕਿ ਨਵਾਂ ਸ਼ਕਤਿਸ ਨੂੰ ਜੇ ਇਹ ਉਹ ਮਰੀਜ਼ਾ ਤੋਂ ਭਾਵੇਂ ਨਾਲ ਚਲਦੀ ਹੈ ਆਹੋ ਚਲੋ ਵਿਸ਼ੇ ਕਰਦੇ ਆਪਸ ਕੋ ਆਪੇ ਆਦੇਸ਼ ਇਸ ਗੁਣ ਦਾ ਨਹੀਂ ਪ੍ਰਵੇਸ਼ ਤੇ ਉਹ ਗੁਣ ਦਾ ਤੇ ਉਹ ਦਾ ਪ੍ਰਵੇਸ਼ ਨਹੀਂ ਪ੍ਰਵੇਸ਼ ਹਾਂ ਰਜੋ ਤਮੋ ਦੇਖੋ ਰਜੋ ਤਮੋ ਸਤੋ ਵਾਲੇ ਦਾ ਪ੍ਰਵੇਸ਼ ਨਹੀਂ ਗੁਣ ਦਾ ਨਹੀਂ ਕਰਦੇ ਜਿਹੜੇ ਤੁਮਹੋਂ ਸਤੋ ਵਾਲੇ ਜਿਹੜੇ ਸਰਗੋਲ ਨੇ ਉਹਨਾਂ ਦਾ ਤਾਂ ਉੱਥੇ ਐਂਟਰੀ ਨਹੀਂ ਹੋਣੀ ਉਹਨਾਂ ਦੀ ਐਂਟਰੀ ਨਹੀਂ ਹੋਣੀ ਜਿਹੜੇ ਤਿੰਨ ਗੁਣਾਂ ਵਾਲੇ ਇਹਨਾਂ ਦੇ ਨੇ ਨਾ ਫਿਰ ਤੇ ਬਾੜੇ ਕੁਆਲੇ ਤੂੰ ਦੇਖਦੀ ਹੈ ਆਦੇਸ਼ ਜਿੱਥੇ ਆਪਣੇ ਆਪ ਨੂੰ ਆਪੇ ਨੂੰ ਹੈ ਉੱਥੇ ਤਿੰਨ ਗੁਣ ਬਰ ਰਹਿ ਜਾਂਦੇ ਮਾਇਆ ਕਰੀ ਇਹਨ ਆਪਣੇ ਆਪ ਨੂੰ ਆਦੇਸ਼ ਨੀ ਕਰਦਾ ਆਪ ਲੋਕ ਕਹਿੰਦਾ ਮੈਨੂੰ ਕਰ ਮਰਾਦਨ ਕਹਿੰਦਾ ਲੋਕ ਮੈਨੂੰ ਕਰ ਉਹ ਤੇ ਆਪ ਉਸ ਕੋ ਆਦੇਸ਼ ਉਹ ਤੇ ਤੰਨਾ ਕੋਨਾ ਦਾ ਪ੍ਰਵੇਸ਼ ਨਹੀਂ ਤੰਨਾ ਕੋਨਾ ਦਾ ਕੋਈ ਪ੍ਰਵੇਸ਼ ਨਹੀਂ ਤੰਨਾ ਕੋਨਾ ਅਲੇ ਦੀ ਇੱਟ ਸੱਤ ਖਾਂਡੇ ਜਾ ਕੇ ਕਿਸੇ ਨੇ ਕਿਸ ਨੂੰ ਆਦੇਸ਼ ਨਹੀਂ ਕਰਨਾ ਪਹਿਲੀ ਗੱਲ ਇਹ ਹੈ ਸਾਡੇ ਬਰਾਬਰ ਦੇ ਭਾਈ ਦੇ ਉਥੇ ਨਾ ਦੇ ਉਥੇ ਕੜਾ ਕੋ ਗੁਰੂ ਹੈ ਨਾ ਕੋਈ ਮੇਰੇ 202 200 ਦੀ ਕਿਹਨੂੰ ਆਦੇਸ਼ ਕਰੂੰਗੇ 300 ਆਈ ਨਹੀਂ ਕਰ ਸਕਦੇ ਤੁਸੀਂ ਉਥੇ ਆਦੇਸ਼ ਕਿਹਦੇ ਨੂੰ ਬਰਾਬਰ ਦਾ ਹੀ ਆ ਉਹ ਵੀ ਫੋਨ ਪਰ ਮਾਰਦਾ ਆਦੇਸ਼ ਕਿਹਨੂੰ ਕਹਿੰਦਾ ਹੱਥ ਫਲਾ ਲਾ ਕੇ ਜਿੱਤਾਂ ਮੈਨੂੰ ਕਹਦਾ ਮੈਂ ਦੂਗਾ ਸਾ ਜਿੱਤਾਂ ਮੈਨੂੰ ਦੂਗਾ ਮੈਂ ਦੂਗਾ ਆਪਸੇ ਆਪਸੇ ਚੇਕੀਦਾ ਹੈ ਇੱਕ ਦੂਏ ਨੇ ਆਪਸ ਕੋ ਆਪਿਆਂ ਦੇ ਦਾ ਮਤਲਬ ਟਾਈ ਵਿਨੋ ਦੇ ਦਾ ਤਾਂ ਮੈਂ ਜਨੂ ਕਰਦਾ ਜਿਹੜਾ ਜਿੱਥੇ ਉੱਥੇ ਕੋਈ ਬੜਾ ਕੋਈ ਛੋਟਾ ਹੈ ਕ੍ਰਿਸ਼ਨ ਤਨਾ ਗੁਣਾ ਚ ਸਾਰੇ ਇਥੇ ਉਹ ਕਹਿੰਦੇ ਉੱਥੇ ਸਰਗੋਣਾ ਵਾਲਿਆਂ ਦੀ ਐਂਟਰੀ ਤੁਹਾਡੇ ਅੰਦਰ ਹੀ ਹੁੰਦੀ ਸੱਚ ਜਾਣ ਕੇ ਤੁਹਾਡੇ ਉਤਾਰ ਨੇ ਥੱਲੇ ਹੀ ਨੇ ਹੋ ਉਹ ਉਹਦਾ ਸਰਮੇ ਇਹ ਉਤਾਰ ਸਾਰੇ ਇੱਥੇ ਤੋਂ ਕੱਢ ਦੂਦੇ ਹੀ ਨੇ ਮਾਇਆ ਜਿਹੜਾ ਅਰਾਹਾਰੇ ਉਤਾਰ ਨੇ ਜਿਹੜਾ ਜਿੰਨਾ ਹਉਣ ਵਾਲੇ ਨੂੰ ਇਹਨਾਂ ਨੇ ਵਧਿਆ ਨਾ ਸਰਗੋਣਾ ਤੇ ਮਾਇਆ ਦਾ ਨਹੀਂ ਦੋ ਸਰਗੋਣ ਦਾ ਨਹੀਂ ਤਨਨਾਵ ਦਾ ਪ੍ਰਵੇਸ਼ ਜੇ ਹੋਵੇ ਤੇ ਰੈਕਟਰੀ ਹੋਣੀ ਹੋਣੀ ਹੈ ਰੈਕਟਰੀ ਉੱਤੇ ਬਰਾਬਰੀ ਹੈ ਉਹ ਬਰਾਬਰੀ ਬੁੱਝਦੇ ਨਹੀਂ ਤੇ ਵੱਡੇ ਨੇ ਉਹ ਬਰਾਬਰੀ ਨਹੀਂ ਬੁੱਝਦੇ ਬਰਾਬਰੀ ਹੈ ਬਰਾਬਰੀ ਉਹਨੇ ਕਰਦਾ ਜੇ ਬਰਾਬਰੀ ਹੁੰਦੀ ਉਹ ਬਰਾਬਰੀ ਨਹੀਂ ਹੈ ਰਾਮਕੀਰ ਜਿੱਥੇ ਬਰਾਬਰੀ ਨਹੀਂ ਹੈ ਆਪਨੇ ਤਾਂ ਗੁਰੂ ਹੈ ਗੁਰੂ ਨੂੰ ਆਦੇਸ਼ ਕਰਦਾ ਉਹ ਕਰਦਾ ਰਾਮ ਜੀ ਤੋਂ ਰੁਪਿਆ ਹਰ ਉਹਦੇ ਭਾਈ ਦੱਸਦੇ ਨੇ ਸਗਾਈ ਵਾਈ ਗੱਲਦਾ ਰੋਜ਼ ਚੌਥੇ ਦਾ 200 ਮੈਂ ਤੇ ਉਹ ਗੱਲ ਇਹ ਪੜਾਈ ਹੋਰ ਉਹ ਹੋਰ ਰਵੇ ਦੇ ਵਿੱਚ ਪੜ ਕੇ ਦੇਖ ਲੋ ਥੇ ਵੀ 200 ਨੇ ਕਰ ਜੈ ਇੱਕ ਇੱਕ ਇੱਥੇ ਆ ਗੁਰੂ ਕੌਣ ਕਹੀਏ ਜੈਰਾ ਗੁਰੂ ਦੇਲਾ ਹੈ ਨਹੀਂ ਉਹ ਤੇ ਗੁਰੂ ਦੇਲਾ ਹੈ ਰਮਨ ਚੱਕਰੋ ਕੋਹੜ ਚੱਕਰੋ ਗੁਰੂ ਦੇਲਾ ਪਾਇਆ ਨਹੀਂ ਉਸੇ ਕਿਹਨੇ ਕੋਈ ਦੇਲਾ ਹੈ ਕੋਈ ਇਸਦਾ ਤਾਂ ਗਾਂ ਕੋ ਆਪੇ ਆਦੇਸ ਆਪਸ ਕੋ ਆਪੇ ਆਦੇਸ ਪ੍ਰਵੇਸ਼ ਕਿੰਨਾ ਵਾਲੇ ਦਾ ਕੋਈ ਪ੍ਰਵੇਸ਼ ਨਹੀਂ ਉਸੇ ਇਹ ਜੋ ਤੁਮ ਸਾਤੇ ਵਾਲਾ ਕੋਈ ਕੋਈ ਉਕਰਨੇ ਪ੍ਰਵੇਸ਼ ਕਿਉਂ ਨਹੀਂ ਉਕਰ ਡਿਜ਼ਨ ਹੈ ਇਹ ਉਕਰਣਾਂ ਦਾ ਰੱਖਿਆ ਪਰਗੋ ਬੇਟਾ ਆਇਆ ਸਾਹ ਹਾਂ ਜੇ ਇੱਕੇ ਇੱਕ ਇੱਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਅਵੇ ਗਏ ਗਏ ਉਹ ਅੰਦਾਜ ਭਗਵੰਤਾ ਇੱਕ ਹੈ ਸਾਰੇ ਭਗਵੰਤਾ ਨੇ ਕੋਈ ਰੂਪ ਹੈ ਜੇ ਭਗਵੰਤਾ ਇੱਕ ਜਦ ਉਹ ਜੀਵ ਉਹ ਸਰੂਪ ਜੇ ਇੱਕ ਭਗਵੰਤਾ ਵੀ ਇਹ ਹੀ ਹੈ ਭਗਵੰਤਾ ਹੀ ਹੈ ਆਪੇ ਮੈਂ ਪੁੱਗ ਮੰਤਾ ਤਵੇ ਲੈ ਕੌਣ ਹੈ ਚਿੰਤਾ ਕਿਸ ਲਾਗੇ ਚਿੰਤਾ ਅਚੰਤ ਕੌਣ ਹੈ ਚਿੰਤਾ ਜੇ ਨਾ ਉਹ ਹਸਨ ਚਿੰਤਾ ਹੁੰਦੀ ਉਹ ਹਸਨ ਚਿੰਤਾ ਨਹੀਂ ਹੁੰਦੀ ਜੇ ਆਪ ਆਪ ਪਿਆਰਾ ਕੌਣ ਕਹੇ ਕੌਣ ਸੁਣਨੇ ਮਾਰ ਆਪ ਆਪ ਪਿਆਰਾ ਆਪਣੇ ਆਪ ਨੂੰ ਆਪੇ ਬਣਾਇਆ ਮਨ ਨੂੰ ਜਦ ਮਨ ਦੀ ਤਸਲੀ ਆਪੇ ਕਰਾਈ ਹੈ ਆਪਣੇ ਮਨ ਨੂੰ ਆਪੇ ਬਣਾਇਆ ਤਾਂ ਕਦੋਂ ਕਰ ਲਾ ਆਲਾ ਕੌਣ ਹੈ ਸੁਣਨ ਵਾਲਾ ਕੌਣ ਹੈ ਬੋਲਣ ਵਾਲਾ ਕੌਣ ਹੈ ਬੁੱਧਣ ਵਾਲਾ ਹੋ ਮਨ ਰੋਗ ਉਹਨਾਂ ਦਾ ਦੁਆਦੀ ਕੋਈ ਵੀ ਆਪਣੇ ਆਪ ਬਸੂ ਆਪੇ ਬੁਣਾਈਦਾ ਆਪਣੇ ਹੱਥੀ ਆਪਣਾ ਆਪੇ ਹੀ ਹੈ ਨਾ ਕਿਸੇ ਨੇ ਇਹਨੂੰ ਪਟਾਇਆ ਪ੍ਰੋਥਾ ਕਰਾਇਆ ਪਟਿਆ ਮੁਰਦਾ ਪ੍ਰੋਥਾ ਜਲਾਣਾ ਕਦ ਵੀ ਲੈਣਾ ना ਕਿਸੇ ने ਨੂੰ ਕਨਫਰੈਂਸ ਲਿਆ ਨਾ ਕਿਸੇ ਦਿਨ ਨੂੰ ਪ੍ਰੋਸੈਸ ਕੀਤਾ ਆਪਣੇ ਆਪ ਤੇ ਹੀ ਪ੍ਰੋਸੈਸ ਕੀਤਾ ਆਪਣੇ ਮਨ ਨੂੰ ਆਪੇ ਬੁਲਾਇਆ ਹਾਂਜੀ ਤੇ ਕੌਣ ਕਿਸੇ ਕੋਲ ਸੁਣਨੇ ਆ ਰੋ ਬਹੁ ਬੇਅੰਤ ਉੱਚ ਦੇ ਉੱਚਾ ਨਾਨਕ ਆਪ ਕੋ ਆਪੇ ਪਹੁੰਚ ਬਹੁ ਬੇਅੰਤ ਉੱਚ ਦੇ ਉੱਚਾ ਹੁਣ ਬਹੁਤ ਬੇਅੰਤ ਦਾ ਪੂਰਾ ਜੀਣਾ ਆਪਣਾ ਆਪਣੀ ਇਹਦੀ ਆਪਣੀ ਅਸਰ ਚਿੱਤ ਦੀ ਜਿਹੜੀ ਅਵਸਥਾ ਸੀ ਨਾ ਧਿਆਨ ਸੀ ਚਿੱਤ ਭਦੇ ਆਇਆ ਸੀ ਬੰਦੇ ਸੀ ਬੰਦੇ ਜਿਹੜਾ ਮੰਨਿਆ ਸੀ ਉਹਦੇ ਵਰਗਾ ਹੀ ਹੋ ਗਿਆ ਉਹਦੇ ਅਸਰ ਅਬ ਉਸ ਕੋ ਆਪੇ ਪਹੁੰਚ ਜਾ ਉਹ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਿਆ ਆਪਸ ਆਪੇ ਪਹੁੰਚਿਆ <laughs> अपने के जित, तक जित की ऊंचाई तक आप पे पहुंचे आपको अपने वचन क्या वो चेतसी निर्मलता की निर्मलता ओदे के गुण तक ओदे वर्ग सभा उस अवस्था दुमान आप पे पहुंचे पता दो जड़ा सस्ति ਅੰਤਾਂ ਜਿਹੜਾ ਸਰੀਰ ਚੱਲਦਾ ਸੀ ਸੱਜਾ ਪਾਸਾ ਖੱਬਾ ਪਾਸਾ ਉਹ ਜਦ ਤੂੰਦਾ ਸੋਹ ਗਿਆ ਉਹਦੇ ਵਰਗਾ ਹੀ ਹੋਇਆ ਓਏ ਉਹਦੇ ਵਰਗਾ ਹੀ ਹੋਇਆ ਉਹ ਜਾਇਦਾ ਸੱਜਾ ਪਾਸਾ ਦਾ ਹੋ ਜਾਂਦਾ ਖੱਬਾ ਹੋ ਗਿਆ ਫਰਦ ਉਸ ਤੋਂ ਹੋ ਕੇ ਤੇ ਆਪਣੀ ਜਿਹੜੀ ਫਰਦ ਦੁਸਤੀ ਹੈ ਪਹਿਲ ਤੋਂ ਉਸਦੀ ਖਰਾਬ ਹੋਈ ਸੀ ਤਦuar ਜੀਗਾ ਹੋਵੇ ਹੋਗੀ ਸੀ ਕੂਬੇ ਧਾਗੀਆ ਬਿਮਾਰੀ ਹਟਿਆ ਤਾਂ ਦਸੁਸਤੀ ਮੇਰਾ ਜਿਹੜੀ ਸੰਦੁਸਤੀ ਖੁਸ਼ੀ ਹੋਈਦੀ ਉਹ ਹੀ ਮਿਲਿਆ ਕੁਛ ਨਹੀਂ ਮਿਲਿਆ ਹੋਰ ਜਦੋਂ ਨਪੜਾ ਘਰ ਆ ਗਿਆ ਤੇ ਘਰ ਆ ਕੇ ਹੋਇਆ ਪਰ ਹੋ ਗਿਆ